ਸਰਿਸਾ ਸਿੰਘ ਜੀ ਸਾਰੇ ਗੱਜ ਕੀ ਆਖੋ ਤਨਸੀਸਾ ਕੋ ਚ ਜੀ ਸਿੰਘ ਜੀ ਇਹ ਮਾਤਾ ਜੀ ਜਿਹੜੇ ਮਾਤਾ ਗੁਰਚਰ ਕੌਰ ਜੀ ਇਹ ਪਿੱਛੋਂ ਸੰਤਨਗਰ ਤੋਂ ਮਨੇ ਔਰ ਸੰਤਨਗਰ ਨਾ ਸਰਗੁਰ ਪ੍ਰਤਾਪ ਸਿੰਘ ਜੀ ਦੇ ਜਿਹੜੇ ਬਹੁਤ ਹੀ ਅਨੰਦ ਭਗਤ ਸੇਵਕ ਸੰਤਾਲਾ ਸਿੰਘ ਜੀ ਉੱਥੇ ਨਿਵਾਸ ਕਰਦੇ ਸਨ ਉਦੇ ਕਰਕੇ ਉਸ ਪਿੰਡ ਦਾ ਨਾਮ ਹੀ ਜਗ ਮਲੇਰਾ ਸੀ ਤੇ ਉਹਦਾ ਨਾਮ ਸੰਤ ਨਗਰ ਪੈ ਗਿਆ। ਔਰ ਬਹੁਤ ਹੀ ਉਥੇ ਸਾਧਾਂ ਦੀ ਮੰਡਲੀ ਹੁੰਦੀ ਸੀ। ਸੰਤਾਲਾ ਸਿੰਘ ਜੀ, ਬਾਬਾ ਫਰੀਦ ਜੀ, ਸੂਬਾ ਬਰੀਆਮ ਸਿੰਘ ਜੀ ਇਹ ਸਾਰੇ ਉਥੇ ਮੈਂ ਵੀ ਉਥੇ ਕਈ ਵਾਰੀ ਉਹਨਾਂ ਦੇ ਚਰਨ ਪਰਸੇ ਇਹਨਾਂ ਸਾਧੂਆਂ ਦੇ ਉਥੇ ਜਾ ਕੇ ਮੈਂ ਵੀ ਕੀਰਤਨ ਮੈਂ ਛੋਟਾ ਹੁੰਦਾ ਸ਼ਬਦ ਪੜ੍ਹਦਾ ਹੁੰਦਾ ਸੀ। ਮੈਨੂੰ ਕੋਈ ਸ਼ਬਦ ਆਉਂਦਾ ਸੀ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਵਾਜ ਮੇਰੀ ਬੜੀ ਪਤਲੀ ਜੀ ਹੁੰਦੀ ਸੀ ਤੇ ਮੈਂ ਵਾਜਾ ਵਜਾ ਕੇ ਤੇ ਉੱਥੇ ਸ਼ਬਦ ਪੜਨਾ ਤੇ ਸੰਤਾ ਨੇ ਬੜਾ ਖੁਸ਼ ਹੋਣਾ ਵੀ ਮੁੰਡਾ ਆਇਆ ਵੀ ਚਲੋ ਅੱਜ ਸ਼ਬਦ ਸੁਣਨੇ ਆ ਤੇ ਇਹ ਮਾਤਾ ਜੀ ਜਿਹੜੇ ਨੇ ਸਾਡੇ ਗੁਰਦੇਵ ਸਿੰਘ ਜੀ ਉਸਤਾਦ ਹਨ ਦੇ ਔਰ ਸੁਰਜੀਤ ਸਿੰਘ ਹਨ ਦੇ ਇਹ ਸਾਸੂ ਜੀ ਨੇ ਔਰ ਬੜੀ ਖੁਸ਼ੀ ਹੋਈ ਹੈ ਕਿ ਪਹਿਲੀ ਵਾਰੀ ਇੱਥੇ ਦਰਸ਼ਨ ਦੇ ਰਹੇ ਨੇ ਇੰਗਲੈਂਡ ਦੇ ਵਿੱਚ ਔਰ ਸਾਰਾ ਇਦੇ ਪਿੱਛੇ ਇਹਨਾਂ ਦੀ ਤੀ ਜਿਹੜੀ ਹੈ ਬੀਬੀ ਗੁਰਮੀਤ ਘਰ ਗੁਰਦੇਵ ਸਿੰਘ ਜਰਾਂ ਦੀ ਪਤਨੀ ਉਹਦਾ ਹੱਥ ਹੈਗਾ ਉਹਨੇ ਆਪਣੀ ਮਾਂ ਅਸੀਂ ਉਹਨੂੰ ਵੀ ਮਾਤਾ ਦੇ ਦਰਸ਼ਨ ਜੀ ਇਹ ਜਿਹੜੇ ਲੋਕ ਹੈਗੇ ਨੇ ਇਹ ਸਾਨੂੰ ਗੁਰਦੇਵ ਸਿੰਘ ਦੀ ਮਾਤਾ ਸੀ ਇਹ ਸਾਰਿਆਂ ਦਾ ਜਥਾ ਸੀ ਇਹ ਅਸਰ ਦੀ ਵਾਰ ਸਾਰੇ ਉਹਨਾਂ ਦੇ ਕੋਲ ਲਾਉਂਦੇ ਹੁੰਦੇ ਸੀ ਔਰ ਸ਼ਬਦ ਪੜ੍ਹਦੇ ਹੁੰਦੇ ਸਨ ਬੜੀ ਕਿਰਪਾ ਸੱਚੇ ਬਾਸ਼ਾ ਦੀ ਇਹਨਾਂ ਤੇ ਔਰ ਹੋਂਦ ਪਰ ਇਸ ਮੰਨੇ ਸ਼ਬਦ ਪੇਸ਼ ਕਰਨਗੇ ਔਰ ਉਮੀਦ ਹੈ ਤੁਸੀਂ ਆਨੰਦ ਲਹੋਗੇ recono it la kara ਗੁਰਤ ਤੋ ਕੁਰਬਾਨ ਨੀਚਾ ਯੂ ਚਕਰਾਂ ਮੈਂ ਗੋਬਿੰਦ ਨੀਚਾ ਯੂ ਚਕਰਾਂ ਮੈਂ ਗੋਬਿੰਦ ਆਹ ਤੇਨਾ ਇੱਕ ਥੋੜੀ ਆਪਣੀ ਮਿੱਟੀ ਵਰਤ ਦਾ ਹਰਦਾ ਸੰਸਾ ਸੰਦੇਸ਼ਾ ਨਾ ਪੇੜ ਕਰਨਾ ਇਹ ਸਤਿਗੁਰੂ ਜੀ ਨੇ ਮੇਰੇ ਤੇ ਉਹ ਕਿਰਪਾ ਕੀਤੀ ਕਿ ਜੋ ਮੈਂ ਕਹਿ ਨਹੀਂ ਸਕਦੀ ਆਪਣੀ ਜੁਬਾਨ ਤੋਂ ਸੱਚੇ ਪਾਤਸ਼ਾਹ ਦੀ ਵਾਰਤਾਏ ਮੇਰੇ ਪੇਟ ਦੇ ਵਿੱਚ ਰਸੌਲੀ ਹੋ ਗਈ ਜਿਹੜੀ ਕਿ ਮੈਂ ਬੇ ਕੋਈ ਬਸ ਲਾਲ ਆਜੋ ਹੋ ਚੁੱਕਿਆ ਸੀ ਗੁਰਦੇਸ਼ ਅੱਜ ਕੀਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਹੁਕਮ ਕੀਤਾ ਡਾਕਟਰ ਦਰਨਾਲਿਆ ਦਵਾਈ ਵਾਸਤੇ ਔਰ ਮੈਂ ਜਿਵੇਂ ਬੱਚਾ ਹੁੰਦਾ ਨਾ ਅੜੀਆਂ ਕਰਦਾ ਤੇ ਮਾਪੇ ਤਕੇ ਨਾ ਦਵਾਈ ਦਿੰਦੇ ਨੇ ਮੈਂ ਇਸ ਤਰ੍ਹਾਂ ਦੀ ਸਾਂ ਮੈਂ ਕਹਿੰਦਾ ਨਹੀਂ ਸੱਚਾ ਜੀ ਮੈਨੂੰ ਨਹੀਂ ਕਰ ਆਪੇ ਰਾਜੀ ਹੋ ਜਾਏਗੀ ਤੂੰ ਪਰ ਮੈਂ ਫਿਰ ਲੋਕਾਂ ਨੇ ਕਹਿ ਲਿਆ ਕੋ ਆਯਾ ਲੋਕੀ ਚਿੰਦੇ ਨੇ ਆਨੇ ਨਹੀਂ ਪ੍ਰੇਸ਼ਣ ਨਹੀਂ ਕਰਾਣਾ ਤੇਰਾ ਬਿਲਕੁਲ ਮੈਂ ਕਿਹਾ ਸੱਚਾ ਜੀ ਜਿਵੇਂ ਜਹਾ ਤੁਹਾਡੀ ਆਪ ਜੀ ਦੀ ਕਿਰਪਾ ਕਰਦੇ ਤੇ ਮੇਰੇ ਤੇ ਸਾਸ ਜੀ ਮੈਨੂੰ ਨੀ ਪਤਾ ਮੇਰੀ ਬਿਮਾਰੀ ਕਿੱਧਰ ਗਈ ਏ ਮੈਨੂੰ ਕੋਈ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਮੇਰੇ ਨਾਲ ਵਾਰਤਾਰ ਕਿ ਕਹਿ ਤੇ ਤੇ ਪੁੱਛੋ ਜਾ ਕੇ ਮੈਂ ਮੇਰੇ ਕੋਲ ਕੀ ਕਾਗਜ਼ ਕੀ ਚੀ ਤੇ ਮੇਰੇ ਤੇ ਕਿਰਪਾ ਆਪ ਨੇ ਫਿਰ ਸੱਚੇ ਪਾਤਸ਼ਾਹ ਜੀ ਮਸਤਾਨਗੜ ਬੜਾ ਕੇ ਮੈਨੂੰ ਆਂਦੇ ਨੇ ਤੇਨੂੰ ਜਿਹੜੀ ਬਿਮਾਰੀ ਤੇਨੂੰ ਕਿੱਥੋਂ ਆਮ ਆਇਆ ਸੀ ਵੇਖੋ ਸੱਚੇ ਪਾਛ ਦੀਨ ਜੀ ਮੈਂ ਗਰੀਬ ਨੂੰ ਆਜਾ ਆਪ ਅੰਦਰ ਜਾਮੀ ਸਭ ਕੁਝ ਜਾਣਨ ਆ ਰਹੋ ਮੈਨੂੰ ਕੀ ਪੁੱਛ ਦਿਓ ਕੇਵਰ ਕਾਰਡ ਕਿਰਪਾ ਮਿਹਰ ਤੇ ਕੀਤੀ ਹੈ ਆਪਣੇ ਆਪ ਦੀ ਜਾਨ ਮੈਂ ਸਾਸਾਂ ਦੇ ਦਰਸ਼ਨ ਕਰਨ ਬੈਠੀ ਹਾਂ ਮੈਂ ਜਬਾਨ ਨਾਲ ਕੁਝ ਅਨੁਸਤ ਕਰ ਨਹੀਂ ਸਕਦੀ ਐਸੀ ਐਸੀ ਮੇਰੇ ਲਾ ਤੁਜ ਬੇਨ gana sa abbe sarai tuj bin kon na kara har jite sabai sarai tuj bin kon na kara sarai tuj bin kon na kara har jite sabai